ਆਈ ਬਿਗੁੱਤਾ ਜਗ ਜਮ ਪੰਥ ਆਈ ਨਾ ਮੇਟਣ ਕੋ ਸਮਰਤ ਆਈ ਬਿਗੁੱਤਾ ਅਗ ਬਗੁੱਚ ਗਿਆ ਰੱਬ ਦੇ ਵਿੱਚ ਆ ਖੋ ਗਿਆ ਨਾਮ ਦੇ ਪੰਥ ਵਿੱਚ ਪੈ ਗਿਆ ਰੋ ਜਮ ਦੇ ਮਾਰਗ ਵਿੱਚ ਹੁਣ ਟੇਪਾਸੇ ਪੈ ਗਿਆ ਨਾ ਜਗ ਦੇ ਮਾਰਗ ਤੇ ਬਗੁੱਚ ਗਿਆ ਖੋ ਗਿਆ ਆਪਣੇ ਰੂਪ ਨੂੰ ਮਾਇਆ ਹੀ ਸਮਝਣ ਲੱਗਿਆ ਹੂੰ ਹੂੰ ਆਇਨਾ ਮੇਟਲ ਕੋਸਮ ਰਤ ਇਹਦਾ ਪਰਮ ਦਾ ਨਾਸ ਕਰਨ ਵਾਸਤੇ ਸਨ ਮਨਤਬੁੱਧ ਨਾਸ ਕਰਨ ਦੀ ਸਸ ਜੀ ਹਾਂ ਜੀ ਆ ਅੱਠਾਲ ਵੀ ਦਰ ਹੋਏ ਹਾਂ ਜੀ ਆ ਅੱਠਾਲ ਅਜਾ ਸੰਸਾਰੀ ਤਾਲ ਕਰ ਵੀ ਹੁੰਦਾ ਅੱਛਾ ਜੀ ਆਠ ਦੇ ਤੇ ਵਿੱਚ ਹੋਏ ਆਠ ਦੇਖ ਨਿਮਹਿ ਜਿਸ ਦੇ ਜਿਸ ਦੋਏ ਜਿਸ ਦੋਏ ਹਾਂ ਜੀ ਆਪ ਸੈਲ ਅਨ ਆਥ ਸੈਲ ਨੀਚ ਕਰ ਹੋਏ ਆਥ ਦੇਖਨੇ ਮੈਂ ਜਿਸ ਦੋਈ ਤੋਏ ਜੀਵੇ ਦਰੇ ਮਾਇ ਤਾਰੀ ਮਾਇ ਤਾਰੀ ਉਪੇਕੇ ਵਾਹ ਰੂ ਮਾਇ ਦੇ ਕਦੀ ਵੀ ਬੀਆ ਅੱਛਾ ਹਕੇ ਅਰਾ ਮਾਇ ਰੂ ਦੀ ਕੌਣ ਦਾ ਬਹਾਦਰ ਜੇ ਦੀ ਮਾ ਆਠ ਹੋਏ ਤਾਂ ਬੁਗਤ ਸੇ ਆਣਾ ਭਗਤੀ ਵੀ ਹੋਣੀ ਜਨ ਬੋ ਰਾਨਾ ਆ ਨਹੀਂ ਤਾਂ ਨਾਮ ਵੀ ਤੇ ਵੀ ਜੱਗ ਬੋ ਰਹਾ ਹੋਇਆ ਤੇ ਮੁਗਧ ਸਿਆਣਾ ਤੋ ਕੀ ਭਾਵਾ ਜੀ ਆਤ ਹੋਏ ਤਾਂ ਸਿਆਣਾ ਨਾਮ ਹੋਵੇ ਤਾਂ ਬੂਰਕ ਜੀ ਗਿਆਨ ਹੁੰਦਾ ਬੂਰਕ ਲੋਕ ਕਹਿੰਦੇ ਉਹ ਬੂਰਕ ਤਾਂ ਸਿਆਣਾ ਹੁੰਦਾ ਬੂਰਕ ਜਿਹਦੇ ਕੋਲ ਧਨ ਹੋਵੇ ਜਾਂਦਾ ਨਾਮ ਤਨ ਲੋਗ ਅੱਛਾ ਜੀ ਲੋਕ ਉਹ ਤਾਂ ਮੁਗਤ ਕਹਿੰਦੇ ਪਰ ਵੈਸੇ ਸਿਆਣਾ ਹੁੰਦਾ ਜੀ। ਹਾਂ। ਭਗਤੀ ਵੀ ਹੁੰਨਾ ਜਗ ਬੋਹਰਨ। ਭਗਤ ਵੀ ਹੁੰਨਾ ਹੁੰਦਾ ਜਗ ਬੋਹਰਨ ਵੀ ਹੁੰਨਾ ਜਗ ਪਾਗਲ ਹੋਇਆ ਅੱਛਾ ਜੀ ਜਦੋਂ ਆਤ ਨਾਲ ਸੈਲ ਲੱਗਦਾ ਫਿਰ ਇਹ ਇਹ ਮਾਇਆ ਦੀ ਗੱਲ ਹੈ ਜੀ ਹਾਂ ਠੀਕ ਹੈ ਤੇ ਜੇ ਕੱਲਾ ਆਤ ਹੈ ਤਾਂ ਫਿਰ ਨਾਮ ਹੈ ਜੀ ਇਹ ਨਾਮ ਫਿਰ ਪਹਿਲਾਂ ਐਸੇ ਨਾ ਆਤ ਸੈਲ ਨੀਚ ਕਰ ਹੋਏ ਆਤ ਦੇਖ ਜਿਸੈ ਅਨਿਮੈ ਜਿਸ ਦੋਏ ਸੈਦ ਮਾਇਆ ਨਾ ਅੱਛਾ ਜੀ ਤੇ ਜਦ ਦੁਆਰਾ ਆਤ ਹੋਈ ਤਾਂ ਮੁਗਧ ਸਿਆਣਾ ਭਗਤੀ ਵਿਹੂਨਾ ਜਗ ਬਰਨ ਇੱਥੇ ਫਿਰ ਆਤ ਜਿਹੜਾ ਨਾਮ ਵਸਿਆ ਹੈ ਜੀ ਹਾਂ ਜੀ ਹਰ ਤੇ ਸਭ ਮੈਂ ਵਰਤਾ ਇੱਕੋ ਸੋਈ ਸਭ ਮੈਂ ਵਰਤੇ ਇੱਕੋ ਸੋਈ ਸਾਰੇ ਜਿੱ ਕੋ ਵਰਤਦਾ ਉਹ ਜੋਤ ਵਰਤੀ ਹੈ ਸਾਰੇ ਜੀ ਜਿਸ਼ਨੂ ਕਿਰਪਾ ਕਰੇ ਤਿਸ ਪ੍ਰਗਟ ਹੋਈ ਪਰਗਟ ਹੁੰਦਾਈ ਤੇ ਦਈਆ ਕਰ ਹੋ ਜਾ ਠੀਕ ਹੈ ਜੀ ਪਰਗਟ ਹੁੰਦੀ ਐ ਤਾਂ ਮਿਹਰਤ ਦੀ ਐ ਪਰਗਟ ਹੁੰਦੀ ਐ ਉਹਨੂੰ ਗਿਆਨ ਹੋ ਜਾਂਦਾ ਸਮਝ ਲੈਂਦਾ ਦੇਖ ਲੈਂਦਾ ਜੇ ਪਰਗਟ ਹੁੰਦੀ ਦਰਸ਼ਨ ਹੋ ਜਾਂਦੇ ਨੇ ਠੀਕ ਹੈ ਜੀ ਪਰਗਟ ਰਹੀ ਆ ਉਹਤਰਾਇਆ ਦਈਏ ਤੇ ਦਰਸ਼ਨ ਲਈ ਉਦਾਰ ਠੀਕ ਹੈ ਜੀ ਪਰਗਟ ਵਾਸਤੇ ਉਦਮ ਤਾਂ ਕਰਨਾ ਪਏਗਾ ਹਾਂ ਹਾਂ ਠੀਕ ਹੈ ਜੀ